ਕਿ ਕਬੀਰਾ ਮਰਤਾ ਮਰਤਾ ਜਗ ਮੂਆ ਮਰ ਬਹੀ ਕੋਈ ਐਸੀ ਮਰਨੀ ਜੋ ਮਰੈ ਨਾ ਮਰਨਾ ਹੋਏ ਕਬੀਰ ਕਹਿੰਦਾ ਜਗ ਸਾਰਾ ਸਾਰ ਜੰਮ ਲਈ ਜੁਦਾ ਬਰੀ ਜੁਦਾ ਕੋਈ ਜਾਣਦਾ ਕੀ ਹੈ ਅਕਲ ਦੇ ਵਿੱਚ ਬਿਲਕੁਲ ਪੈਦਾ ਹੋ ਬੋਲਦਾ ਜਦੋਂ ਮਾਇਆ ਦੀ ਉਹਦੋਂ ਜੋ ਪੈਦਾ ਹੁੰਦੀ ਬੰਦ ਹੋ ਗਈ ਚੁੱਪ ਹੋ ਗਿਆ ਹੈ ਫਿਰ ਤੁਸ਼ ਹੋ ਗਿਆ ਮਾਇਆ ਦੀ ਇੱਛਾ ਬੁਖਰੇ ਦਰ ਨਾਲ ਹੀ ਫਿਰ ਗਿਆ ਠੀਕ ਹੈ ਜੀ ਉਹ ਬੋਲਦਾ ਰਹੇ ਉਹ ਕੀ ਗੁਰਬੀ ਦੁਜਾ ਦੇ ਕੋਈ ਕਿਹੜਾ ਲੋ ਜਰੂਰੀ ਕੋਸ਼ਿਸ਼ ਇਹ ਨਹੀਂ ਕੀਤੀ ਜਿਵੇਂ ਜਦ ਅਸਰ ਬੋਲੀ ਜਦ ਉਹ ਕੋਵਰ ਬੁਰਸ ਉੱਠੇ ਹੋ ਆਟਾ ਦੇ ਆਪਣੇ ਗੁਰਦੂਰ ਉਹ ਜੀ ਗੁਪਤ ਵਾ ਉਹਦਾ ਪਤਾ ਲੱਗਿਆ ਦੁਬਾਰਾ ਫਿਰ ਉਹਦਾ ਬੁਰਾ ਨਹੀਂ ਹੋਣਾ ਇਹਨਾਂ ਪੋਸਤਰੀ ਕਿਰਲ ਵਰਗੇ ਆ ਉਹ ਦੁਆਰਾ ਮੁਰਨ ਦੀ ਦੁਆਰਾ ਜਨਮ ਨਹੀਂ ਹੁੰਦਾ ਜਨਮ ਹੁੰਦਾ ਹੀ ਨਹੀਂ ਕੋਲੋ ਸੈਟੀ ਬੜੀ ਇਹ ਬਰੇ ਬੜ ਨੂੰ ਬੰਦ ਹੋਏ ਤੇ ਦੇ ਦਿਨ ਦੁਆਰਾ ਹੁੰਦੀ ਤੇ ਵਿਲੂਗ ਤਾਂ ਬੜਾ ਅੱਛਾ ਜੀ ਤੇ ਪਹਿਲਾਂ ਵੀ ਸ਼ਲੋਕ ਜਿਹੜਾ ਇਸ ਤੋਂ ਪਹਿਲੀ ਪੌੜੀ 'ਚ ਸ਼ਲੋਕ ਆਇਆ ਸੀ ਉਹਦੇ ਵਿੱਚ ਵੀ ਮਰਨ ਦਾ ਜ਼ਿਕਰ ਆਇਆ ਸੀਗਾ ਐਸੀ ਮਰਨੀ ਕਿਉਂ ਲਿਆ ਉੱਪਰ ਤਾਂ ਮਰਦਾ ਸੀਗਾ ਇੱਥੇ ਮਰਨੀ ਦੀ ਗੱਲ ਕੀ ਹੋ ਰਹੀ ਹੈ ਆ ਐਸੀ ਮੰਦੇ ਵੀ ਕੋਈ ਹੈ ਜਿਹੜੀ ਸੰਸਾਰ ਨਹੀਂ ਜਾਣਦਾ ਸੰਸਾਰ ਸਿਰਫ ਕੱਚਾ ਫਲ ਹੈ ਕਟਰੀਆ ਧੋੜਲਿਆ ਕੁਝ ਕਹਿ ਸਕਦੀ ਸਕਿਆ ਅੱਛਾ ਜੀ ਜਦੋਂ ਪੱਕਾ ਭਾਰ ਸ਼ਰੀਰ ਨੂੰ ਆਪੇ ਟੁੱਟ ਜਾਂਦੇ ਆਪਰੇ ਢਾਲ ਲੂ ਫਿਰ ਬਾਹਰ ਨੂੰ ਨਾ ਕੇ ਢਾਲ ਮੇਰੇ ਨੂੰ ਭੁੱਖ ਦੀ ਕਹਦੀ ਰਖ ਤੋ ਹੋਰ ਰਸ ਦੀ ਭੁੱਖ ਦੀ ਕਹਦੀ ਇਹ ਕਿਹੜੇ ਕਰਦੂ ਹੈ ਜੀ ਗੁਰ ਮਹਲਾ ਤੀਜਾ ਕਿਆ ਜਾਣਾਂ ਕਿ ਮਰਾਂਗੇ ਕਿਹੈਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ ਕਿ ਬੋਲਦੇ ਦੋ ਪ੍ਰਕਾਰ ਦੇ ਇੱਕ ਦਾ ਬੰਦ ਨੇ ਸੁਸਾਰੀ ਹੈ ਉਹ ਤਾਂ ਬਰਦਾਈ ਹੀ ਦੇ ਇਹ ਤਾਂ ਉਸ ਮਰਦੇ ਦੇ ਵਿਚਾਰੇ ਵਿਚਾਰੇ ਦੇ ਨੇ ਜਿਹੜੇ ਲਕਰੀ ਕੋਲ ਦੇ ਸਰੀਰ ਚੜਤਾ ਗਾ ਦੇ ਲੈ ਲੈ ਕਦੇ ਚੜਤਾ ਗਾ ਦੇ ਲੈ ਲਿਆ ਕੱਪੜਾ ਪਾ ਲਿਆ ਫਿਰ ਖਲਾਤਾ ਕਿਆ ਜਾਣੀ ਕਦੋਂ ਮਿਲੇ ਜੇ ਕਦੇ ਕੀ ਪਤਾ ਕਵੇ ਕਵੇ ਵਾਰੰਦੀ ਬਹੁਤ ਕਵੇ ਹੋਊਗੀ ਫੈਸਾ ਗੁੰਡਾ ਹੋਏ ਗੁੰਡਾ ਕਿੱਸਾ ਹੁੰਦਾ ਹੈ ਫਿਰ ਉਹ ਬੰਦਾ ਨਹੀਂ ਫਿਰ ਉਹ ਤਾਂ ਗਰੀਆ ਕੇ ਅਕਾਲ ਖਾਦ ਦੇ ਜੇਕਰ ਸਾਹਿਬ ਨੂੰ ਨੋ ਵਿਸਰੇ ਸੱਲਾ ਬਣ ਲਓ ਜੇ ਸਾਹਿਬ ਨੂੰ ਬੋਲੇ ਕਿ ਤੇਰੇ ਹੈ ਵਿਸਰੇ ਹੀ ਨੋ ਕਰ ਬਣ ਨੋ ਬੜਾ ਤੋਖਾ ਤੋਖਾ ਬੜਾ ਜਲੂ ਬੋ ਤੋਖਾ ਹਰਨ ਜੇ ਨੋ ਬਾਕੀ ਬ੍ਰਾਂਡ ਨਿਕਲਦੇ ਨੇ ਹੈ ਉਹ ਹੈ ਕਹਿੰਦੇ ਜੇਕਰ ਸਾਹਿਬ ਨੂੰ ਨੋ ਵਿਸਰੇ ਸਾਹਿਬ ਨੂੰ ਸਾਥ ਨਾਲ ਜੁੜੇ ਆਪਣੇ ਸਾਹਿਬ ਨੂੰ ਜੁੜਿਆ ਰਹੇ ਆਪਣੇ ਸਤ ਦੇ ਨਾਲ ਚਰਨਾਂ ਨਾਲ ਜੁੜਿਆ ਰਹੇ ਸੇ ਸੋਖਰ ਬੋਲੋ ਸਹਲਾ ਅਸਤੋ ਦੁੱਖ ਤਕਲੀਫ ਨਹੀਂ ਹੁੰਦੀ ਨਹੀਂ ਇਹ ਦੁੱਖ ਤਕਲੀਫ ਦੀ ਗੱਲ ਹੋ ਹੈ ਕਿ ਮਰ ਰਿਆ ਹੀ ਤਾਂ ਜਾ ਸਕਦਾ ਹੈ ਗਾ ਜਦੋਂ ਸਾਹਿਬ ਨਾਲ ਜੁੜ ਗਿਆ ਮਨ ਉਹਦੀ ਗੱਲ ਹੋ ਰਹੀ ਹੈ ਸਾਰ ਛੱਡ ਲਓ ਉਹ ਤਕਲੀਫ ਇਹ ਦੁੱਖ ਤਕਲੀਫ ਹੁੰਦੀ ਹੈ ਠੀਕ ਹੈ ਜਸ ਅਈਵੋ ਜਸ ਸਭ ਕੁਝ ਪਹਿਲੇ ਜੱਟਿਆਂ ਹਾਂ ਸੇ ਤਦ ਸੁਜੋੜ ਅਵਰ ਸੰਗ ਤੋੜੀ ਤੋ ਪਹਿਲੇ ਯਾਰ ਬਿਠਾਉ ਤਾ ਸਭ ਕੁਝ ਬਦੀ ਸਹਿਬ ਨਾਲੇ ਹੋਵੇ ਸਹਿਬ ਨਾਲੇ ਜਾਂਦੇ ਬਸ ਅਕੇਲ ਸਾ ਅਕੇਲਾ ਠੀਕ ਹੈ ਜੀ ਮਰਨੇ ਤੇ ਜਗਤ ਡਰੈ ਜੀਵਨਿਆ ਲੋੜੈ ਸਭ ਕੋਏ ਹਾਂ ਜੈ ਜੰਦੇ ਦੇ ਜਿੱਤੇ ਦੁਬਾਰਾ ਗੁਰrfloor ਦੀ ਦੁਬਾਰਾ ਗੱਲਬਾਤ ਲਈ ਹੋਈ ਦੀ ਦੁਬਾਰਾ ਕਿਸੇ ਨੂੰ ਦੇਖਣਾ ਨਹੀਂ ਜੀ ਬਤੇ ਲੋੜ ਸਰ ਕੋਈ ਸਭ ਕੋਈ ਇਹ ਜਲਦ ਵੀ ਬਈ ਜਿਉਂਦਾ ਰ ਪਰ ਗੁਰ ਐਸਾ ਵੀ ਤਰੀਕਾ ਹੈ ਰੂਪ ਹੈ ਜੁਗਤ ਹੀ ਬਰ ਜਲਦੇ ਨਾ ਇਹ ਤੋਹਰੇ ਤੋੜ ਲੈਂਦਾ ਉਦੋਂ ਜੀਵਤ ਬਗਿਆ ਉਸ ਵਸਤ ਕਰਦੇ ਨੇ ਅੱਛਾ ਕਿ ਗਿਆਨ ਪਰ ਬਾਣੀ ਦਾ ਇਹ ਸੋਚੀ ਕਰਦਾ ਗੈਬ ਜੀ ਜੀਵਤ ਆ ਜਾਏ ਉਹ ਜੂਦਾ ਵੀ ਮਰ ਜਾਂਦਾ ਹੂੰ ਹੂੰ ਗੁਰਪ੍ਰਸਾਦੀ ਜੀਵਤ ਮਰੇ ਕਿਉਂਕਿ ਹਕੂਮਤ ਨੇ ਨਾਲ ਬਲ ਬਿਚ ਬਲ ਠੀਕ ਹੈ ਜੀ ਪਹਿਲੂ ਮੁਝ ਕਹੇ ਹੀ ਇਹ ਵਸਤੂ ਪ੍ਰਾਪਤ ਹੋ ਸਕਦੀ ਹੈ ਠੀਕ ਹੈ ਸਮਝ ਰਹੇ ਹੋ ਹੁਕਮ ਭੁਜ ਲਿਆ ਇਹਨੇ ਹੁਕਮ ਜਮਨ ਬਲ ਕੋ ਪੇਲੀ ਦਿੱਤਾ ਲੈ ਜਾਏ ਹੁਕਮ ਦੇਣੇ ਸੁਭਾਈ ਉਹ ਕੋਲ ਨਾਲ ਜੁੜਿਆ ਰਹਦਾ ਆਇਆ ਸੀ ਜਦਵੀ ਹੁਕਮ ਨਾਲ ਜੁੜ ਕੇ ਆਇਆ ਸੀ ਜਾਊਗਾ ਜਦਵੀ ਹੁਕਮ ਦੇ ਨਾਲ ਜੁੜ ਕੇ ਜਾਊਗਾ ਜਿਦਾਂ ਜੇਦਵਾਰਾ ਜਾਲੂ ਦੀ ਉਦਾਂ ਉਹਨਾਂ ਦੇ ਹੁਕਮ ਦੇ ਵਿੱਚ ਸਭ ਆਇਆ ਲੱਗੂਆ ਹੰਨ ਨਵੇਂ ਲੋ ਗੁਰਬਾਨੀ ਦਾ ਗੁਰਬਾਨੀ ਦੇ ਕੇ ਦੀ ਸੋਜੀ ਰਹਾ ਜੀਵਤ ਰਹਾ ਸ਼ਰੀਰ ਦੇ ਹੁੱਦਈ ਤੇ ਦਾ ਬੋ ਮਾਇਆ ਸਭ ਤਿਆਗ ਦਵੇ ਜੋ ਕੁਛ ਐਸੋ ਤੇਰਾ ਤੇਰਾ ਤੁਝ ਸਭ ਤੇ ਕਹ ਲਾ ਕੇ ਇਹ ਗੱਲ ਤੇ ਦਿਰ ਹੋ ਜਾਂਦਾ ਇਹ ਗੱਲ ਨੂੰ ਜਾਣ ਲੈਂਦਾ ਵੀ ਇਹ 베ਰਾ ਕੁਝ ਮੇਰੇ ਚੋ ਠੀਕ ਹੈ ਜੀ ਹੁਕਮ ਹੈ ਸੋਈ ਠੀਕ ਕੋ ਕੋ ਨੂੰ ਬੁੱਝੇ ਲੰਘਾ ਨਾਨਕ ਐਸੀ ਮਰਣੀ ਜੋ ਮਰਐ ਤਾਂ ਸੱਦ ਜੀਵਨ ਜੀਵਨ ਹੋਈ ਸਦਾ ਜੀ ਉਧਰ ਰਹਿਣੇ ਦਵਾਰਾ ਜਨੂਰੀ ਉਧਰ ਜਾ ਆਪ ਕਿਰਪਾਲ ਹੋਵੇ ਹਰ ਸੁਆਮੀ ਤਾਂ ਆਪਣਾ ਨਾਮ ਆਪ ਜਪਾਵੈ ਆਪੇ ਸਤਗੁਰ ਮੇਲ ਸੁਖ ਦੇਵੈ ਆਪਣਾ ਸੇਵਕ ਆਪ ਹਰ ਭਾਵੈ ਇਹ ਦੁਬੋਧ ਕੰਫਰੰਸ ਦਵੈ ਸੱਚ ਦਾ ਸਮਝਾ ਕੇ ਰੱਖੇ ਆਪ ਕਰਪਾਲ ਹੋਏ ਹਰ ਸਵਭ ਇਹ ਆਪਣੀ ਆਪਣੂ ਚੱਲਦਾ ਹੈ ਗਿਆਨ ਲੈਂਦਾ ਆਪਣਾ ਲੋਹਾ ਆਪ ਜਪਾਵੇ ਗਿਆਨ ਆਪ ਸਮਝੋ ਤੂੰ ਕੀ ਹੈ ਕੀ ਹੈ ਆਪੋ ਜਪਾਵਨ ਨੂੰ ਸੁਧਰ ਨੂੰ ਸੁਖਸ਼ਮ ਰੋ ਸੁਖਸ਼ਣੋ ਬੁੱਧ। ਤੋਕ ਤੇ ਚੜਚੜ ਵਧਕੋ ਗੋ। ਆਪ੍ਰੋਧ ਸੰਤਮ ਹੋ ਰੋ ਗੋ। ਕ੍ਰੋਧ ਔਰ ਕਾਮ ਰੋ ਵਿੱਚ ਚੰਗਰਾ ਤਤਕ ਤਿਆਗ ਦੋ। ਫਿਰ ਕੀ ਆ? ਫਿਰ ਚਲ ਕਰ ਰਹੇ ਆਪ। ਤੇ ਚਲ ਕਰ ਦੇ ਵਿੱਚ ਕੋ ਦਿਖਾਈ ਦਉ ਤੂ। ਜਲ ਵਿੱਚ ਜੀਵਨ ਜੀਵਨ ਜਿੱਥੇ ਉੱਥੇ ਕੋਈ ਦਿਖਾਈ ਦਉ। ਜੀਵਨ ਨਹੀਂ। ਜਦੋਂ ਆਪੇ ਆਪ ਆਪੇ ਜਦੋਂ ਆਪਣਾ ਜਾਬ ਆਪਣੀ ਜਾਬ ਜਪੜੇ ਤੇ ਜਪੜੋ ਇਹ ਤੋਂ ਵੀ ਥੇੜ ਬਦਲ ਗਈ ਸੀ ਥੋੜੀ ਇਹ ਤਾਂ ਗੱਲੇ ਹੋਰ ਉਹ ਜਪੜਲ ਦਾ ਫਰੂਈਆ ਨਾ ਦਾ ਫਰੂਈਆ ਆਪ ਨੂੰ ਐਸੀ ਸਰੀਰ ਬੰਦੀ ਬੈਠਿਆ ਬਜੂ ਦਾ ਜਾਂ ਦਾ ਬਜੂ ਸਰੀਰ ਤੋਂ ਆਵਾਜੋ ਸਰੀਰ ਦਾ ਸਾਡਾ ਰਿਆਕਾਰੀ ਉਹਦਾ ਦਰਸ਼ਨ ਕਰਦੇ थारे जाये। थारे जाये। आप कृपालु होवे हर स्वामी ता अपना नाम हर आप जपावे आपे आप सतगुरु मेल सुख देवे अपना सेवक आप हर पावे अपने नाम लाके बुलाए ते बिदु नौकरी जपाया जो ਅਪਣੇ ਕੋਲ ਬਠਾਰ ਕੇ ਫਰੇਵਣਾ ਪੜਾ ਲੋਕ ਜਪਉਂਦਾ ਇੱਕ ਬੰਦ ਇਕਜਿਤ ਹੋ ਕੇ ਜਪਦਾ ਹੈ ਗੁਰਬਾਣੀ ਸੁਣਦਾ ਤਾਂ ਸਭ ਚਲਦੀ ਹੈ ਇਕੋ ਲਿਖ ਜਿਤ ਹੋ ਕੇ ਜਪਦਾ ਹੈ ਸੁਣਦਾ ਹੈ ਸਭ ਕੁਝ ਚਾਕੇ ਸਾਗ ਆਇਆ ਉਹ ਤਿਆਕੇ ਫੇਰੇ ਦੇ ਕੀ ਹਾਂਜੀ ਆਪੇ ਸਤਿਗੁਰੂ ਮੇਲ ਸੁਖਦੇਵ ਹੈ ਆਪਣਾ ਸੇਵਕ ਹੈ ਆਪ ਭਗ ਸੇਵਕ ਕਿੰਦਾ ਸੇਵਕ ਨੂੰ ਸਾਹਿਬ ਜੇ ਮੈਨਾਂ ਲੱਗਦਾ ਸਾਹਿਬ ਜੇ ਮੈਨਾਂ ਲੱਗਦਾ ਠੀਕ ਹੈ ਜੀ ਕਿਹਨੋਂ ਹੋ ਗਿਆ ਇਹ ਪ੍ਰੇਮ ਜਿੱਦ ਸੇਵਕ ਨੇ ਵਾਸਤੇ ਆ ਗਿਆ ਦੁਤਿ ਕੋਈ ਲੱਗਣ ਦਿੰਦਾ ਬੇਗਨ ਸਭ ਦੁੱਖ ਰੱਖ ਰਿਹਾ ਕੋਈ ਰੁਕਾਵਟ ਨਹੀਂ ਆਉਂਦਾ ਇਹ ਵਿਅੋਹ ਦੀ ਕਿਰਪਾ ਉਹਨੂੰ ਹੋਰੇ ਰਸਤੇ ਕੱਢ ਕੇ ਲੈ ਜਾਂਦਾ ਕਾਰ ਵਾਲੇ ਰਸਤੇ ਲੈਦੇ ਤੇ ਕਾਰ ਵਾਲੇ ਰਸਤੇ ਅਲਦਾ ਪਰ ਰਸਤੇ ਨਹੀਂ ਲੋਕਾ ਦੁਨੀਆ ਦੀ ਵਿਟਿਆਈ ਆ ਰਸਤੇ ਚ ਝੜੇ ਕਿਹਦੇ ਨੇ ਤੋਂ ਪਾਸੇ ਦਿਖਾ ਦੀ ਕੱਟਦੇ ਲੈ ਤਿਆਗ ਦਿੰਦੇ ਲੋ ਛੋਟੇ ਜਿਹੇ ਦੇ ਗੋਰਾ ਹੋਏ ਠੀਕ ਹੈ ਆਪਣੇ ਸੇਵਕਾਂ 'ਚ ਆਪ ਪੈਜ ਰੱਖਾ ਆਪਣੇ ਭਗਤਿਆਂ ਕੀ ਪੈਰੀ ਪਾਵ ਆਏ ਸੇਵਕ ਉਹਦੇ ਨੇ ਭਗਤ ਉਹਦੇ ਥੋੜਾ ਉਹਨੇ ਫਰਕ ਪਾਇਆ ਇੱਕ ਭਗਤ ਆਇਆ ਤੇ ਸੇਵਕ ਸੇਵਕਾ ਨੂੰ ਭਗਤਾਂ ਦੇ ਪੈਰੀਂ ਪਾ ਦਿੰਦਾ ਪਿੱਛੇ ਲਾ ਦਿੰਦਾ ਵੀ ਇਹਦੀ ਸਹੀ ਗੱਲ ਸੁਣੋ ਬੰਦੋ ਜੇ ਤੁਸੀਂ ਭਾਵੇਂ ਸਾਧਰ ਪਰ ਕਰ ਰਹੇ ਇਹਨਾਂ ਦੇ ਉਹ ਦੂਏ ਦਾ ਦਬਾਉਣ ਵਾਲੀ ਉਹ ਦੇ ਬਾਕੀ ਤਾਂ ਇਹ ਤਾਂ ਬਸ ਆ ਜੀ ਦੇ ਪਾਰ ਕਰ ਲੈ ਉਹਦਾ ਰਸਤਾ ਲੰਗਰੀਓ ਪਹੁੰਚਦਾ ਦੀ ਵਗਰ ਫਸਦਾ ਗੱਲ ਸੁਣ ਲੋ ਤੇ ਕਿ ਸਰੂਵਨ ਲੋ ਸਾਰੇ ਇਹ ਬੋਲ ਰਹੀ ਜੀ ਇਹ ਗੱਲ ਸਮਝਾ ਦਿੰਦਾ ਧਰਮ ਰਾਏ ਹੈ ਹਰ ਕਾ ਕੀਆ ਸੇਵਕ ਨੇੜ ਮੈਂ ਆਵੇ ਕਰਮ ਦਾ ਹਰ ਕਾ ਕੀਆ ਹੈ ਹੀ ਬਣ ਰਿਹਾ ਧਰਮ ਹੈ اچھا جی جے ار کے سےوکرے انہاں نوں تھوڑی کچھ کہنا ہو انہاں دا تے خیال ہے بولے دا رکھوالا ہے ان بندایا دا ڈنڈا وی دوکارے واسطے یا تھلے واسطے ਕੋ ਐਤਰੂਲਾਤਾ ਸਨਰੇ ਵਾਲਾ ਉਧਰ ਦਲਦੀ ਕੀ ਲੋੜੇ ਵੀਰ ਦਾਗੂ ਰਖਵਾਲਾ ਹੋ ਉਧਰ ਰਾਖੀ ਕਰਦਾ ਸਾਡੀ ਉਧਰ ਦਲਦੀ ਕੀ ਲੋੜੇ ਪਰ ਰਾਖੀ ਉਹਦੇ ਕਰਦਾ ਜਿਹੜੇ ਹਰ ਟੇ ਮਾਰਗ ਚੱਲਦੇ ਨੇ ਠੀਕ ਹੈ ਚੱਲਣ ਵਾਲੇ ਹੀ ਰਾਖੀ ਕਰਦਾ ਨਾਲ ਦੇ ਗਲਵਰੇ ਵੀ ਰਾਖੀ ਆਪ ਕਰਦੇ ਉਹ ਕਹਿੰਦੇ ਨੇ ਉਹ ਹਰ ਰੋਟੀ ਕਹਿੰਦੇ ਸਰੋ ਕਹਿੰਦੇ ਆਪੜ ਕੱਟਿਆਪ ਕਰਨਾ ਹੁੰਦਾ ਉਹ ਗਾਇੂ ਨੇ ਖੇਡਿਉਂਦਲੇ ਅ ਡੋਬੂ ਨੋਤਾ ਲਗ ਲਗਰੀ। ਤੇ ਜਦੋਂ ਕਹਿੰਨੀ ਹਰਕਾ ਕੀ ਆ ਤੋ ਕੀ ਭਾਵਨ ਦਾ ਧਰਮ ਰਾਏ ਛੋਟੀ ਪਾਵਰ ਹੈ। ਹਾਂ ਜਿਹੜਾ ਹੈਗਾ ਫੁੱਲ ਪਾਵਰ ਦਾ ਲੋਰ। ਹਰਕਾ ਇੱਕ ਆਪੇ। ਹਰੇ ਆਪੇ ਹੀ ਕਰਗ ਹੈ। ਬਹੁਤ ਉੱਮੀ ਧਰਮ ਰਾਏ। ਧਰਮਰਾਇ ਵੀ ਉਹਨੇ ਪੜਾਈ ਪੜਾਈ ਆ ਹਰ ਜਿਹੜੀ ਉਹਨੂੰ ਪੜਾਈ ਪੜਾ ਗਏ ਕੋਲ ਇੱਕ ਹੋਰ ਆਪਣਾ ਆਪਣਾ ਧਰਮਰਾਇ ਆ ਤਾਂ ਸਿੱਖਿਆ ਚੰਗੀ ਹੋਣੀ ਨਹੀਂ ਪਰ ਹਰ ਦਾ ਹਿੱਸਾ ਹੈ ਨਾ ਬਿਲਕੁਲ ਹਾਂ ਇਹ ਤਾਂ ਧਰਮਰਾਇ ਆ ਤੁਸੀਂ ਕਹਿੰਦੇ ਛੋਟਾ ਹੈਗਾ ਧਰਮਰਾਇ ਹਰ ਵੱਡਾ ਅਜੋ ਹਰ ਜਿਹੜਾ ਐਸਾ ਹਰ ਦਾ ਕੀ ਉਹਦਾ ਜੋ ਮੰਦਪੂਰ ਇਕਦਿ ਹੋਇਆ ਉਹਦੇ ਨਾਲ ਪੂਰਾ ਮੰਦੀ ਸਮਝਿਆ ਜੇ ਅਜੇ ਕੋਈ ਢੋਲ ਵੱਜਦਾ ਹੈ ਜਾਂ ਤਾਂ ਸਭ ਕੋ ਜਾਣ ਹੈ ਅਜੋ ਕਿਤੇ ਕਿਤੇ ਕੋਈ ਢੋਲ ਵੱਜਦਾ ਹੈ ਤਾਂ ਉਹ ਜਿਹੜਾ ਸੇਵਕ ਆ ਜਾਂਦਾ ਹੈ ਉਹ ਹੈ ਜਿੱਦਾਂ ਵੀ ਵੱਜਦਾ ਖੇ ਦੇਖ ਤੇ ਢੋਲ ਵਰਸਾ ਲੈ ਕੇ ਜਾਂਦਾ ਉਹਦੇ ਤਰ੍ਹਾਂ ਦੇਖਿਓ ਦਾਸ ਕਿ ਜਿਹੜੇ ਲੋਕ ਪੱਕ ਨਹੀਂ ਕਰਦਾ ਉਹਦਾ ਫਾਇਨਲ ਦੇ ਲੋਕੀ ਨਾਲ ਸੈਂਦਾ ਕਰਦੀ ਏ ਇਹ ਜਿਹੜਾ ਕਹਿੰਦੇ ਨੇ ਸਖੀ ਸਹੇਲੀ ਗਲ ਗਲ ਵਗੇ ਹੇਲੀ ਇਹ ਜਿਹੜੀ ਸਖੀ ਸਹੇਲੀ ਏ ਇਹ ਰੋਟੀ ਪਿਆਰਾ ਸੋ ਸਬਨਾ ਕਾ ਪਿਆਰਾ ਹੋਰ ਕੀਤੀ ਚੱਖ ਚੱਖ ਸਾਰੇ ਆਗਲ ਦੂਰ ਹੋ ਕੇ ਹਰ ਪਿਆਰਾ ਇਹ ਸਾਰੇ ਉਹਨਾਂ ਥਿਆਗ ਤੇ ਕਰ ਜਿਹੜੇ ਹੱਲ ਜੋੜ ਲਈ ਅਵਸਰਤੋੜ ਲਈ ਉਹਰ ਕੰਮ ਕਰ ਰਹਾ ਹੈ ਉਹ ਸਭ ਨਾਲ ਕਾਇ ਪਿਆਰਾ ਹੋ ਜਾਂਦਾ ਹੈ ਉਹ ਉਸ ਵੇਲੇ ਹੋਵੇ ਤਾਂ ਲੀਡਰ ਵਿਰੋਧ ਕਰਦੇ ਨੇ ਉਹ ਆਦਮੀ ਉੱਤਾ ਦਾ ਖਬਰਾਂ ਦਾ ਪੈ ਰਹੀ ਹੈ ਪਰ ਉਹਨਾਂ ਲੋਕਾਂ ਦੀ ਪਰ ਭੁਗਤ ਪਰਮ ਕਰਕੇ ਨਹੀਂ ਪਿਆਰਾ ਬੁਲਦੇ ਉਹ 100 ਸਾਲ 50 ਸਾਲ ਬਾਅਦ ਬੁਲਦੇ ਠੀਕ ਹੈ ਜੀ। ਇਹਦੀ ਗੱਲ ਤਾਂ ਵਹੀ ਠੀਕ ਹੈਦਾ ਸੀ। ਕਰਦਾ ਦੇ ਲੋਕ ਹਾਜ਼ਰ ਇਸ ਗੱਲ ਨੂੰ ਪੁੱਛਣ ਨੂੰ ਰਾਸ ਦੀ ਹੁੰਦੀ ਹੈ ਗੱਲਾਂ। ਇਹ ਜਿਹਾ ਕਹੀ ਹੋਈ ਕਰਕੇ ਉਹਨਾਂ ਨਹੀਂ ਬਣ ਸਕੇ ਉਹ ਫਿਰ ਜੀਵਨ ਮਨਨ 'ਚ ਪਏ ਰਹਿਨੇ ਹਨ ਜੀ। ਹਾਉ ਬ੍ਰੋਧ ਕਰਵੇਂ ਰਹਿੰਦੇ ਜਿਹੜੇ ਗੁਰਮਤ ਦਾ ਆਮੋ ਜੀ ਕਾਹ ਕਲੀਅਰ ਹੋਇਆ ਇਹ ਹੈ ਉਸ ਵੀ ਦਾ ਦਰੰਦ ਤੇ ਉੱਠ ਪਟਾਕੇ ਲੇਖ ਲਿਖੀ ਜਾਂਦੇ ਚੱਕਰ ਨਾਲ ਲਈ ਇਹ ਗਈ ਚੱਕਰ ਰਹਿੰਦੇ ਰਹੇ ਜੀ ਉਹਨਾਂ ਕੋਲੋਂ ਅਸਰ ਥੋੜੀ ਹੁੰਦੇ ਸਤੇ ਸਭੀ ਦਾਾਰ ਆਦਮੀ ਤੇ ਚੱਕ ਮਰੀ ਜਾਂਦੇ ਨੇ ਹਾਂ ਜੀ ਇੱਥੇ ਪੌੜੀ ਸਮਾਪਤੀ ਹੈ ਜੀ ਹਾਂ